ਸ਼ੁਕਰਵਾਰ ਰੱਬ ਰਹਾ ਸਮਾਈ ਆਪ ਉਪਾਏ ਸਭ ਕੀਮਤ ਪਾਈ ਸ਼ੁਕਰ ਕਰਦੇ ਆਂ ਜਦ ਕੋਈ ਕੰਮ ਬਣ ਆਪਣਾ ਸਹੀ ਇਸਲਾਮ ਦੇ ਘਰ ਮੁੜਿਆਈਏ ਨਾ ਕੋਈ ਕਮੇਲੇ ਆਵੇ ਨਿਆਣਾ ਮਾਪੇ ਸ਼ੁਕਰ ਕਰਦੇ ਤੇ ਆ ਗਿਆ ਬਾਹਰ ਅੱਜ ਬੰਦ ਸੀ ਆ ਕੁਝ ਹੋਰ ਸੀ ਜਿਹੜਾ ਕਾਫੀ ਵੀ ਚੰਗਾ ਹੋਇਆ ਘਰ ਆ ਗਿਆ ਇਹ ਜਦੋਂ ਘਰ ਚ ਲਿਆ ਜਾਂਦਾ ਨਾ ਪ੍ਰਭ ਜੀ ਸਮਾ ਜਾਂਦਾ ਫਿਰ ਸ਼ੁਕਰੇ ਹੁੰਦਾ ਸੁਬੀ ਜਾਂਦੀ ਘਰ ਆ ਜਾਂਦਾ ਫੜਿਆ ਹੁੰਦਾ ਉਹ ਸ਼ੁਕਰ ਸ਼ੁਕਰ ਬਾਹਰ ਹੈ ਉਹ ਜਿਵੇਂ ਸ਼ੁਕਰਾਨਾ ਹੁੰਦਾ ਸ਼ੁਕਰ ਬਾਹਰ ਹੈ ਸ਼ੁਕਰਾਨੇ ਦਾ ਗੱਲ ਇਹ ਹੈ ਕਿ ਆਪਣੇ ਪ੍ਰਭ ਦੇ ਵਿੱਚ ਸਮਾ ਗਿਆ ਆਪਣੇ ਉਰ ਜਾ ਕੇ ਪ੍ਰਭ ਵਿੱਚ ਸਮਾ ਗਿਆ ਇਹ ਪ੍ਰਭ ਵਿੱਚ ਸਮਾ ਗਿਆ ਆਪਣੇ ਘਰ ਆ ਗਿਆ ਆਪ ਹੀ ਪਾਏ ਹੁਣ ਆਪਣਾ ਆਪ ਆਪੇ ਦਾ ਕੰਮ ਹੈ ਇੱਕ ਹੋਇਆ ਤਗਵੇ ਇਕ ਹੋ ਗਿਆ ਸ਼ੁਕਰ ਬਾਹਰ ਹੋ ਗਿਆ ਸ਼ੁਕਰਵਾਰ ਹੋ ਗਿਆ ਹੁਣ ਆਪਣਾ ਆਪ ਪਪਾਉਣਾ ਰਹਿ ਗਿਆ ਬਾਕੀ ਉਗਵੇ ਵਾਲੀ ਗੱਲ ਰਹਿ ਗਈ ਪਪਾਏ ਸਭ ਪਾਉ ਕੀਕ ਪਾਉਗਾ ਤੁਮਰੀ ਉਸਤ ਤੋਂ ਤੁਤੇ ਹੋਵੇ ਪਰ ਆਪਣੀ ਉਸਤ ਦੀ ਉਸਤ ਜੜ ਕਰ ਸਕਦਾ ਜਦ ਆਪਣੇ ਆਪ ਇੱਕ ਹੋ ਕੇ ਉਪੇ ਆਵੇ ਮੈਂ ਇੱਕ ਦੀ ਉਸਤ ਨਹੀਂ ਹਾਂ ਇਹ ਕੋਈ ਤਾਂ ਕੁਬੈ ਉਹ ਤਾਂ ਕਹਿੰਦਾ ਰੋਟੀ ਹੋਵੇ ਰੋਟੀ ਦੇਣਾ ਉਹ ਤਾਂ ਨਹੀਂ ਨਾ ਹੈਗਾ ਨਹੀਂ ਬਹੁਤਾ ਹੀ ਉਗਲਾ ਹਾਂਜੀ ਗੁਰਮੁਖ ਹੋਵੇ ਹੈ ਕਾਰ ਆ ਜਿਹੜੀ ਉੱਪਰ ਗੱਲ ਕਹਿਤੀ ਇਹ ਬੜੀ ਅਟਪਟੀ ਜੀ ਗੱਲ ਹੈ ਲੋਕਾਂ ਨੇ ਨਹੀਂ ਗੱਲ ਮੰਨਣੀ ਇਹ ਕੀ ਵਿਦਵਾਨਾਂ ਨੇ ਨੀ ਇਹ ਗੱਲ ਮੰਨਣੀ ਕੀ ਕਹੇ ਤਾਂ ਨਾਲ ਉਹਨਾਂ ਦੀ ਸਮਝ ਆਉਣੀ ਹੈ ਇਹ ਗੱਲ ਵਿਚਾਰਨ ਵਾਲੀ ਹੈ ਜਿਹੜੀ ਕਹੀ ਹੈ ਇਹਨੂੰ ਵਿਚਾਰੂ ਜਿਹੜਾ ਵਿਚਾਰੂ ਉਹ ਗੁਰਮੁਖ ਕੋਈ ਵੀ ਜਿਹੜਾ ਗੁਰਮੁਖ ਹੋਊਗਾ ਉਹਨੂੰ ਵਿਚਾਰੂਗਾ ਗੱਲ ਠੀਕ ਹੈ ਇਹ ਨਹੀਂ ਕਹੀ ਹੈ ਸਮਝ ਵੀ ਆ ਜੂਗੀ ਮਨ ਵੀ ਲਊਗਾ ਭਾਵੇਂ ਸਮਝਣ ਤੋਂ ਪਹਿਲਾਂ ਹੀ ਕਹੇ ਨਾ ਜੇ ਤਾਂ ਆਏ ਮਾਰੀਆਂ ਨਾ ਨੇ ਉਟੀਆਂ ਸਿੱਧੀਆਂ ਗੱਲਾਂ ਫੇਰ ਉਹ ਮਨੋਖ ਗੁਰਮੁਖ ਹੋ ਗਏ ਜੋ ਕਰੇ ਵਿਚਾਰ ਗੁਰਮੁਖ ਹੋਊਗਾ ਤੈਦੀ ਵਿਚਾਰ ਕਰੂਗਾ ਇਹਨਾਂ ਬਿਲਕੁਲ ਸੱਚੀ ਨਿਕਲੂਗੀ ਸਾਚ ਸਮਾਨ ਕਰਨੀ ਹੈ ਸਾਧ ਸਾਰ ਕਰਨੀ ਹੈ ਵਿਰੋਧੀ ਇਹ ਹੀ ਵਿਚਾਰ ਕਰਨਾ ਸਾਰ ਕਰਨੀ ਹੈ ਸੱਚ ਦੀ ਪ੍ਰਾਪਤੀ ਫਤਿਹ ਕੀਤਾ ਕਰਕੇ ਕੁਝ ਪੱਲੇ ਪੈ ਦੇ ਉਹਦੇ ਇਹ ਸਭ ਪੁਤਲੀਆਂ ਭੰਤੀਆਂ ਦਾ ਸੱਚ ਪੱਲੇ ਪੈ ਜੂਗੇ ਵਿਚਾਰੂਗਾ ਇਹ ਸਾਰ ਕਰਨੀ ਹੈ ਉਹਨਾਂ ਦੋ ਭੰਗਤੀਆਂ ਦਾ ਦੋਵੇਂ ਬੰਦਾ ਨਾਲ ਜਿਹੜਾ ਸੱਚ ਹੈ ਉਹ ਵਿਚਾਰਨ ਤੋਂ ਬਾਅਦ ਉਹਦੇ ਪੱਲੇ ਪੈ ਜੂਗਾ ਉਹਨੂੰ ਵਿਚਾਰਨਾ ਸਾਰ ਕਰਨੀ ਹੈ ਉਹ ਜੋ ਸੱਚ ਲੱਭ ਜੂਏ ਸੱਚਾਈ ਕੀ ਹੈ ਬਹੁਤ ਕੀਮਤੀ ਹੈ ਉਹਦੇ ਵਿੱਚ ਗੱਲ ਲਿਖੀ ਹੈ ਠੀਕ ਹੈ ਜੀ ਹੁਣ ਆ ਇਸ ਤਰ੍ਹਾਂ ਨਹੀਂ ਲੱਗਦਾ ਕਿ ਸੰਜਮ ਸੰਤੋਖ ਬਾਰੇ ਕਿਹਾ ਗਿਆ ਜਿਵੇਂ ਸਤ ਸੰਤੋਖ ਵਿਚਾਰੋ ਸੰਜਮ ਤਾਂ ਕਿਹਾ ਗਿਆ ਸੰਤੋਖ ਤਾਂ ਹੋ ਜਾਊਗਾ ਉਹਨੂੰ ਉਤਨੇ ਗੱਲਾਂ ਕਹੀ ਹੋਈ ਐ ਸੰਤੋਖ ਤਾਂ ਬਾਹਾਂ ਦੀ ਗੱਲ ਕਹਤੀ ਇੱਥੇ ਆਪ ਉਪਾਏ ਜਿਹੜਾ ਗੱਲ ਐ ਉਹ ਚੌਥੇ ਪੱਤ ਦੀ ਗੱਲ ਐ ਸੰਤੋਖ ਤਾਂ ਦੋ ਮੁਕਤੀ ਤਾਂ ਕਦੀ ਗੱਲ ਐ ਆਪਣੇ ਆਪ ਨੂੰ ਆਪੋ ਕੋਣ ਇੱਕ ਵਿਰਛ ਰੂਪ धारण ਕਰਨਾ ਉਹ ਤਾਂ ਗਾਹ ਦੀ ਗੱਲ ਹੈ ਚਾਰੇ ਪਦਾਰਥਨਾਂ ਦੇ ਆਣੇ ਨੇ ਇੱਥੇ ਉਹ ਤਾਂ ਗਾਹ ਦੀ ਗੱਲ ਹੈ ਹੈ ਹਾਂਜੀ ਹੈ ਦੂਜਾ ਜਿਹੜੇ ਵਰਤ ਨੇ ਅਦੂਏ ਕਰਦੇ ਨੇ ਹਿੰਦੂ ਵਰਤ ਵੀ ਰੱਖਦੇ ਨੇ ਨਿਯਮ ਅਨੁਸਾਰ ਰੱਖਦੇ ਨੇ ਔਰ ਕੀ ਖਾਣੇ ਕੀ ਨਹੀਂ ਖਾਣਾ ਕਿੰਨੇ ਵਜੇ ਖਾਣੇ ਕਿੰਨੇ ਵਜੇ ਨਹੀਂ ਖਾਣਾ ਉਹਨਾਂ ਨੇ ਨਿਯਮ ਨੇ ਬਣਾਏ ਹੋਏ ਅੱਡ-ਅੱਡ ਵਰਤਾਂ ਦੇ ਨਿਤ ਪ੍ਰਤ ਪੂਜਾ ਰੋਜ਼ ਪੂਜਾ ਵੀ ਕਰਦੇ ਨੇ ਨਿਤ ਪ੍ਰਤੀ ਰੋਜ਼ ਦੀ ਕਰਿਆ ਜਿਹੜੀ ਉਹਨਾਂ ਦੀ ਪੂਰਤੀ ਉਹਦੇ ਕਰਦੇ ਨੇ ਬਨ ਪੂਜਾ ਸਭ ਪਾਉ ਹੈ ਦੂਜਾ ਜੇ ਉਹਦੀ ਪੂਜਾ ਨਹੀਂ ਨਾ ਵੀ ਕਿਉਂ ਕਰਦੇ ਆ ਕੀ ਜਿਹੜਾ ਮਤਲਬ ਆ ਕੀ ਹੈ ਇਹ ਪੂਜਾਰਤਾ ਗੁੱਜੀ ਨਹੀਂ ਗਈ ਇਹੇ ਉਹ ਫਿਰ ਦੂਜਾ ਪਾਉ ਹੈ ਮਾਇਆ ਦਾ ਹੀ ਹੈ ਉਹਦੇ ਚ ਗੱਲ ਰਹਿ ਜਾਂਦੀ ਫਿਰ ਉਹ ਮਾਇਆ ਦਾ ਹੀ ਧਰਮ ਹੈ ਮਾਇਆ ਪਿੱਛੇ ਹੀ ਆ ਮਾਇਆ ਹੀ ਮੰਗਦਾ ਉਹਦੇ ਵਿੱਚ ਉਹ ਦੂਜੇ ਭੌ ਦਾ ਗੱਲਬਾਤ ਰਹਿ ਜਾਂਦੀ ਹੈ ਉਹਦੇ ਵਿੱਚ ਭੇਡ ਬੁੱਝੋ ਕੀ ਹੈ ਪੂਜਾ ਪੂਜਾ ਸਾਡੇ ਵੀ ਹੈ ਤਨਮਨ ਸਾਡੇ ਹੋਰ ਗੱਲ ਹੈ ਪੂਜਾ ਹੋਰਾਂ ਦੇ ਹੋਰ ਗੱਲ ਹੈ ਪੂਜਾ ਦੇ ਹਾਂਜੀ ਠੀਕ ਹੈ ਜੀ ਪਰ ਆਪਾਂ ਵੀ ਤਾਂ ਨੇਮਤਾ ਕਰਦੇ ਆਂ ਤੇ ਪੂਜਾ ਅਸੀਂ ਵੀ ਜਾ ਕੇ ਕੁਛ ਨਾ ਕੁਛ ਚੜਾਉਂਦੇ ਗੁਰਦੁਆਰਾ ਸਾਹਿਬ ਫਿਰ ਆਪਾਂ ਵੀ ਨਾ ਵਿੱਚੇ ਆ ਗਏ ਫਾਗਨ ਨੂੰ ਕੁਰਬਾਨੀ ਮੰਨ ਲੈਣਾ ਮੰਨੇ ਸੀ ਸੇ ਖਾਣਾ ਨਾ ਕਰੂ ਨਾਲੇ ਤੇ ਬੁੱਝੀ ਕੀਨੀ ਬਾਣੀਆਂ ਅਜ ਤੱਕ ਤਾਂ ਇੱਕ ਪਹਿਤੋਂ ਪਤਾ ਲੱਗਦਾ ਹੈ ਹਾਂਜੀ 4 ਵਜੇ ਆ ਗਏ ਅਜੇ ਥੋੜੇ ਪੈਸੇ ਨੇ ਹਾਂਜੀ ਇੱਥੇ 7ਵੇਂ ਸਾਸਤ ਵਿਚਾਰ ਓਮੇ ਮੇਰਾ ਪਰਮੇ ਸੰਸਾਰ ਜਨੇ ਚਰ ਕੋਈ ਚੰਗਾ ਕਹਿੰਦਾ ਜੇ ਚੰਗਾ ਨਹੀਂ ਦੇਣਾ ਮਾੜਾ ਦੇਣਾ ਇਹੇ ਜੀ ਵਿਚਾਰ ਆ ਉਹਨਾਂ ਦੇ ਵਿੱਚ ਉਹ ਜਿੰਨੇ ਚਾਹਤੇ ਚਾਹਦੇ ਨੇ ਸਾਰੇ ਇਹੋ ਉਹ ਆਪ ਇਸਨੇ ਚਲਦੇ ਜਿਹੜੇ ਵਿਚਾਰ ਕਰਦੇ ਨੇ ਦਿਨਾਂ ਦੀ ਚੰਗੇ ਮਾੜਿਆਂ ਦੀ ਉਹ ਸ਼ਾਸਤਰ ਜਿਹੜੇ ਨੇ ਉਹਨਾਂ ਵਿੱਚ ਇਹੀ ਵਿਚਾਰ ਹੈ ਹਉਮੈ ਮੇਰਾ ਪਰਮ ਸੰਸਾਰ ਹਉਮੈ ਮੇਰੇ ਦੇ ਵਿੱਚੇ ਸੰਸਾਰ ਪਰਮ ਨੇ ਸਕਦਾ ਮੇਰਾ ਹਉਮੈ ਮੇਰੇ ਵਾਸਤੇ ਆਦਨ ਚੰਗਾ ਹੈ ਮੇਰੇ ਵਾਸਤੇ ਆਦੇਸ਼ਾ ਜਾਣਾ ਚੰਗਾ ਹੈ ਇਹਦੀ ਰਾਸ਼ੀ ਆਹ ਇਹਦਾ ਉਹ ਹੈ ਇਹਦਾ ਤੇਵਾ ਡੋਡ ਇਹ ਹਉਮੈ ਹੋਰ ਮੋਹ ਹੈ ਇਹ ਪਰਮ ਹੈ ਕੁਝ ਵੀ ਨਹੀਂ ਹੈ ਵਿੱਚੇ ਨਹੀਂ ਕੁਝ ਵੀ ਨਹੀਂ ਹੈ ਨਾ ਕੋਈ ਚੰਗਾ ਨਾ ਕੁਝ ਮਾੜਾ ਇਹ ਭਰਮ ਵਿੱਚ ਭੁਲਾਏ ਹੋਏ ਨੇ ਲੋਕ ਇਹਨਾਂ ਨੇ ਠੀਕ ਹੈ ਜੀ ਮਨਮੁਖ ਅੰਦਾ ਦੂਜੇ ਭਾਏ ਜਮਦਰ ਬਾਦਾ ਝੋਟਾ ਖਾਈ ਪਰ ਉਹ ਕਜੜਾ ਹੈ ਉਹ ਹੁੰਦਾ ਉਹਨੂੰ ਗਿਆਨ ਨਹੀਂ ਹੁੰਦਾ ਜੋ ਕਹਿ ਦਿੰਦਾ ਕੋਈ ਬੰਦ ਲੈਂਦਾ ਦੂਜੇ ਭਾਏ ਕਿਉਂਕਿ ਮਾਇਆ ਦੀ ਭੁੱਖ ਅੰਦਰ ਨੂੰ ਵੀ ਪਤਾ ਇਹਨੂੰ ਕਮਜ਼ੋਰੀ ਹੈ ਮਾਇਆ ਦੀ ਇਹਦੇ ਅੰਦਰ ਉਹ ਬਸ ਐਂ ਕਹਿੰਦਾ ਵੀ ਐਂ ਕਰ ਲੈ ਆ ਉਹ ਭਾਏ ਤੈਨੂੰ ਆ ਮਿਲ ਜੂਗਾ ਮਿਲ ਉਹ ਦੂਜੇ ਪਾਏ ਆ ਉਹ ਵਿਆਨੀ ਹੈ ਦੂਜੇ ਮਗਰ ਲੱਗ ਜਾਂਦਾ ਛੇਤੀ ਜੋ ਮੂਰਖ ਦੀ ਮਤਲਬ ਹੈ ਜਿਹੜਾ ਹੈ ਚੋਰ ਆਰਾਮ ਖੋਰ ਖਾਏ ਧਰਮ ਦੇ ਵਿੱਚ ਵਧਿਆ ਹੋਇਆ ਕਾਲ ਦੇ ਫਾਸ ਦੇ ਵਿੱਚ ਜਖੜਿਆ ਹੋਇਆ ਜੰਮੇ ਮਰੀ ਜਾਂਦਾ ਝੋਟਾ ਖਾਈ ਜਾਂਦਾ ਹਾਂਜੀ ਗੁਰ ਸਦਾ ਸੁਖ ਪਾਏ ਸਚ ਕਰਨੀ ਸਾਚ ਲਿਵ ਲਾਏ ਵਰ ਪ੍ਰਸਾਦੀ ਜੇ ਗਿਆਨ ਮਿਲ ਜਾ ਉਹਨੂੰ ਕਿਤੋਂ ਗਿਆਨ ਦਾ ਪ੍ਰਸਾਦ ਸਦਾ ਸੁਖ ਪਾਏ ਸਦਾ ਲਈ ਸੁਖ ਹੋ ਜਾਂਦਾ ਫਿਰ ਬੰਦ ਹੋ ਜਾਂਦੀਆਂ ਨੇ ਜਮਣ ਵਾਂਗ ਕਟਿਆ ਜਾਂਦਾ ਵੀ ਉਹਨੂੰ ਨਹੀਂ ਲੱਗਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਵ ਲਾਏ ਕਰਨੀ ਸਚਿਆਰੀ ਹੋ ਜਾਂਦੀ ਹੈ ਉਹ ਕਰਣੀ ਦਾ ਸੱਚਾ ਹੋ ਜਾਂਦਾ ਹੈ ਸਭ ਨੂੰ ਵਿਚਾਰ ਕਰਦਾ ਹੈ ਸੱਚ ਦੀ ਕਮਾਈ ਕਰਦਾ ਹੈ ਉਹ ਸਾਡਾ ਲੈਵ ਲਾ ਕੇ ਆਪਣੇ ਮੂਰ